ਪੰਨ ਪੰਨ ਘੜੀ ਐ ਘੜ ਘੜ ਭੱਜੈ ਤਾਂ ਹੈ ਉਸਾਰ ਉਸ ਰੇਟਾ ਹੈ ਹਾਂਜੀ ਪੰਨ ਪੰਨ ਘੜੀ ਐ ਹਾਂਜੀ ਜੇ ਨਹੀਂ ਮੱਟ ਪਹਿਲਾਂ ਬਣ ਜਾਂਦੀ ਐ ਉਹ ਬਦਲੀ ਪੈਂਦੀ ਐ ਜੇ ਠੀਕ ਨਹੀਂ ਬਣਦੀ ਜੋ ਮੱਟ ਦਾ ਸਰੂਪ ਘੜਿਆ ਜਾਂਦਾ ਹੈ ਦੁਰਮੱਤ ਦੁਆਰਾ ਮਨਮੱਤ ਦੁਆਰਾ ਉਹ ਰੂਪ ਠੀਕ ਨਹੀਂ ਰਹੁੰਦਾ ਹਾਂਜੀ ਜਿੰਨਾ ਗੁਰਮਤਿ ਅਨੁਸਾਰ ਠੀਕ ਨਹੀਂ ਹੁੰਦਾ ਉਹ ਬੰਨਣਾ ਪੈਂਦਾ ਪਰ ਲੋੜ ਇੰਡੀਪੈਂਡੈਂਟ ਆ ਫਿਰ ਪੱਲ ਕੇ ਘੱਡ ਲੋ ਵੀ करना ਅੱਛਾ ਜੀ ਉਸ ਰੂਪ ਠੀਕ ਕਰਨਾ ਪੈਂਦਾ ਗੁਰਮਤਿ ਅਨੁਸਾਰ ਕਰ ਲੋ ਪੈਂਦਾ ਹੂੰ ਹੂੰ ਪੰਨੂ ਪੰਨੂ ਕੜਿਆ ਹਾਂਜੀ ਕੁਝ ਵੇਲਾ ਬਿਚੋਂ ਬਨੋਤਾ ਕੱਟੀ ਕੁਝ ਨਵੀਆਂ ਗੱਲਾਂ ਮੰਦੀ ਦੀਆਂ ਨੇ ਕੁਝ ਤਰ੍ਹਾਂ ਦੀਆਂ ਗੱਲਾਂ ਛੱਡੀ ਦੀ ਇਹਦੇ ਉਹ ਜਿਹੜੀਆਂ ਛੱਡਤੀਆਂ ਉਹ ਭਲਤੀਆਂ ਜਿਹੜੀਆਂ ਨਵੀਆਂ ਐਡ ਕਰ ਲਈਆਂ ਮੰਨ ਲਿਆ ਉਹ ਨਾਲ ਜੋੜ ਲੀਓ ਉਹ ਜੋੜ ਲੀਓ ਉਹ ਕਰ ਲਈ ਬਾਤ ਉਹਦੇ ਨਾਲ ਹੂੰ ਹੂੰ ਆ ਹੋਏ ਤੇ ਬੰਦੇ ਉੱਤਸਰਦੇ ਰਹਿੰਦੇ ਨੇ ਗਿਆਨ ਦੇ ਬੋਲ ਜਿਹੜੇ ਦਰੇ ਦਰੇ ਗਾਲ ਦੇ ਬੋਲ ਜੀ ਅੱਛਾ ਜੀ ਸਰੀਰ ਵੀ ਉੱਤਸਰਦੇ ਰਹਿੰਦੇ ਨੇ ਢਹਿਦੇ ਰਹਿੰਦੇ ਨੇ ਕਦੇ ਕੋਈ ਜੋਗ ਮਤਸ ਰਹਤੇ ਸੀ ਕਦੇ ਕੋਈ ਮਤਸ ਰਹਤੇ ਆ ਜਾਂਦੀ ਹੈ ਕਦੇ ਕੋਈ ਮਤਸ ਰਹਤੇ ਆ ਜਾਂਦੀ ਹੈ ਕਦੇ ਕੋਈ ਮਤਸ ਰਹਤੇ ਆ ਜਾਂਦੀ ਕਿਸੇ ਕਿਸੇ ਕਦੇ ਕਿਸੇ ਜਾਂ ਲੋਰ ਵਾਜਨ ਦੇ ਕਦੇ ਕਿਸੇ ਲੋਰ ਵਾਜਨ ਤੇ ਉਹ ਸਾਦ ਹੀ ਹੈ ਉਹੀ ਵੀ ਹੋਈ ਬੁੱਧੀ ਆ ਅੱਛਾ ਜੀ ਉਸਰੇ ਉਸਰੇ ਆਨੂੰ ਢਾਦਨ ਦੀ ਹਟਾਇਆ ਇਹਨੂੰ ਸਾਰ ਦਦੀ ਕਿ ਪੰਨ ਪੰਨ ਖੜੀਏ ਤਾਂ ਠੀਕ ਹੈ ਘੜ ਘੜ ਭੱਜੇ ਕੜੀ ਹੋਈ ਭੱਜੀ ਆ ਬੰਨਾਂ ਨਹੀਂ ਘੜੀ ਹੁੰਦੀ ਗਰਮੰਦੀ ਹੋਈ ਟੁੱਟਦੀ ਆ ਅੱਛਾ ਭੱਜੇ ਕੀ ਭਾਵ ਜੀ ਟੁੱਟ ਜਾਣਾ ਅੱਛਾ ਜੀ ਫੇਰ ਮਦੀ ਜਲ ਪੰਨ ਪੰਨ ਘੜੀਆ ਹੈਗਾ ਫੇਰ ਇਹ ਤੋਂ ਕੀ ਭਾਵ ਬੰਦ ਕੜੀ ਹੋਈ ਜਿਹੜੇ ਸਖ ਠੀਕ ਚੰਗੇ ਭਲੇ ਮਤਾਂ ਧੜੀ ਹੋਈ ਹੋਈ ਉਹ ਮੋਬਲੇ ਬੰਨਤੀ ਉਹਦੋਂ ਦੀ ਅੱਛਾ ਜੀ ਉਲਟੇ ਦਾ ਸਾਹਿਬ ਸਾਰੇ ਠੀਕ ਹੈ ਜੀ। ਸਤਾਈਆਂ ਦੀ ਦਰ ਆਕਾਰ ਗੁਰੂ ਨੂੰ ਤੋੜ ਕੇ ਦੇਹਦਾਰੀ ਗੁਰੂ ਨਾਲ ਜੋੜ ਨਹੀਂ ਦਿੱਤੇ। ਹਮਮ। ਕੜੇ ਹੋਏ ਵੀ ਭੱਜੇ ਨੇ ਸਾਰੇ। ਜਿਹੜੇ ਹੋਏ ਤੇ ਜਿਹੜੇ ਭੱਜੇ ਨੇ। ਅੱਛਾ ਜੀ। ਅੱਗੇ ਅੱਛਾ ਜੀ ਸਭ ਸਰ ਪਰ ਹੈ। ਪੀ ਪਰ ਪੋਖ ਹੈ। समरथ वे पर समरथ वे परवा है हर पर, पर सो के परे होए सो रोवन ने स्वाद अंदर अच्छा जी जिनों दा ज्ञान ते सरोवर परे सारे ने सारे सुख जानदे ने सुख जानदे ने टूड़ साफ तो हो जाता सुख जानदे ने ठीक है जी जेड़े बड़े, बड़े, बड़े <laughs> ਉਹ ਗਿਆਨ ਗਏ ਕੁਮਾਰ ਆਣ ਗਏ ਹੁਣ ਹਰਦੇ ਉਹਨਾਂ ਦੇ ਅੱਛਾ ਜੀ ਭਾਈ ਉਸ ਵਿੱਚ ਪਾਵ ਤਾਂ ਹੋ ਗਿਆ ਉਹ ਵਿੱਚ ਬਾਣੀ ਨਹੀਂ ਸੀ ਉਹ ਸੀ ਉਹ ਜਿਹਨੂੰ ਗਿਆਨ ਸਮਝਦਾ ਗਿਆਨ ਹੈ ਨਹੀਂ ਦੀ ਦੱਸੋ ਕਿਹਾ ਠੀਕ ਹੈ ਇਹ ਭਰਕਾ ਦੁਬਾਰਾ ਭਰਦੇ ਕੇ ਫਿਰ ਕਮਲ ਖਿਲੜ ਇਹਦੇ ਦੁਬਾਰਾ ਪੱਲਿਆ ਨਾ ਸਹੀ ਗਿਆਨ ਨਾਲ ਅੱਛਾ ਫਿਰ ਪੋਖਾ ਜਾਊਗਾ ਪੋਖਿਆ ਆਇਆ ਪੋਖੀ ਤੁਖਾਰਨ ਬਿਆਪੀ ਕਾਂਟ ਚ ਮਿਲਿਆ ਹਮੋਂ ਓਕੀ ਹੋਇਆ ਹੰਦਾ ਪੋਖੀ ਨੰਬਲੋ ਰੱਜੀ ਗਈ ਤਾਂ ਰਾਜ ਜਾਊਗਾ ਤਾਂ ਸੰਤੋਖ ਹੋਊਗਾ ਉਹ ਗਿਆਨ ਨਾਲ ਤਾਂ ਦੋਖੇ ਨਹੀਂ ਆਉਂਦਾ ਜਮੇਰੀ ਵਾਲਾਂ ਨਾਲ ਗਿਆਨ ਸੀ ਜੋ ਪਹਿਲਾ ਗਿਆਨ ਹੈ ਗੁਰਮੰਦਾ ਜੋ ਸੰਪਰਦਾਇ ਟੀਕਿਆਂ ਦਾ ਗਿਆਨ ਹੈ ਉਹਦੇ ਨਾਲ ਦਾ ਸਿੱਧਾਉ ਖੌਂਦਾ ਹੀ ਜੱਲ੍ਹੇ ਵਾਲਾਂ ਦਾ ਹੈ ਜਾਂ ਦੂਜਿਆਂ ਦਾ ਇਹ ਸੰਤੋਨਾਂ ਦਾ ਗਿਆਨ ਦੋਈ ਗਿਆਨ ਕੋ ਜਨ ਠੀਕ ਹੈ ਜੀ ਦੋਈ ਤੋਰ ਤੇ ਦੋਈ ਪੰਧ ਤੇ ਦੋਹਾਂ ਵੱਲੋਂ ਸਮਰੱਥ ਵੇ ਪਰਵਾਹ ਨਹੀਂ ਤਾਂ ਧੰਨ ਵਾਲਾ ਤਾਂ ਸੁਭਰਾਤਾ ਬੇਪਰਵਾਹ ਹੈ ਸੁਭਰਾਤਾ ਕੀ ਹੈ ਧੰਨ ਦੇ ਵਿੱਚ ਬੇਪਰਵਾਹ ਹੀ ਹੈ ਪਰਵਾਹ ਵੀ ਦੀ ਵੀ ਆ ਮੇਰਾ ਇਹ ਤਰਫਦਾਰੀ ਨਹੀਂ ਕਰਦਾ ਕਿਸੇ ਦੀ ਬੇਪਰਵਾਹ ਹੋ ਤਰਫਦਾਰੀ ਨਹੀਂ ਕਰਦਾ ਕਿਸੇ ਨੇ ਲਿਆ ਚਾਹੇ ਕਿਸੇ ਨੇ ਨਹੀਂ ਲਿਆ ਸੱਚ ਤਾਂ ਸੱਚ ਉਹ ਗੱਲ ਦੀ ਪਰਵਾਹ ਨਹੀਂ ਕਰਦਾ ਵੀ ਇਹ ਮੇਰੇ ਨੇੜੇ ਹੈ ਮੇਰਾ ਲਿਆ ਜੀ ਹੈ ਰੀ ਲਿਆ ਜੀ ਸੱਚ ਸੱਚ ਹੈ ਠੀਕ ਹੈ ਪਰਮ ਪੁਰਾਣੀ ਭਏ دیਵਾਨੇ ਬਿਨ ਭਾਗਾਂ ਚਾ ਪਾਈ ਨੇ ਬਾਯਾ ਕੇ ਹੂੰ ਕੇ دیਵਾਨੇ ਪ੍ਰਾਣੀ ਝੂਠ ਡਸੌੜੀ ਪਾਈ ਠੀਕ ਹੈ ਜੀ ਬਾਯਾ ਕਹਦੇ ਬਾਂਦੇ ਹੁੰਦੇ ਨੇ ਨਾਮ ਕੇ دیਵਾਨੇ ਨਹੀਂ ਹੁੰਦੇ ਅੱਛਾ ਜੀ ਬਿਨ ਭਾਗਾਂ ਕਿਆ ਪਾਈਏ ਨਾਮ ਨੇ ਤਾਂ ਪਰਵਾਨੇ ਹੁੰਦੇ ਅੱਛਾ ਨਾਮ ਨੇ ਪਰਵਾਨੇ ਨੇ ਚੜ ਕੇ ਮਨ ਨਾਲੇ ਉੱਤੇ ਨੇ ਬਿਨ ਭਾਗਾਂ ਕਿਆ ਪਾਈਏ ਆਗਾ ਨੇ ਵੇਣਾ ਕੁਛ ਨਹੀਂ ਮਰਦਾ ਮਾਇਆ ਚੋਂ ਵੀ ਹਰਦਾ ਪਾਗੇ ਠੀਕ ਹੈ ਜੀ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੱਚੇ ਤਿਨ ਜਾਈਏ ਗੁਰਮੁਖੀ ਜਾਲ ਡੋਰੀ ਪ੍ਰਭ ਪਕੜੀ ਗੁਰਮੁਖਾਲੇ ਗਿਆਨ ਦੀ ਧੋਰੀ ਤਾਂ ਪ੍ਰਭ ਨਹੀਂ ਪਕੜੀ ਹੋਈ ਹੈ ਉਹ ਮੁਗਾਣੇ ਜਾਂਦੀ ਦੌੜੀ ਕਿਉਂ ਕਿ ਉਹ ਸਰਤ ਹੁੰਦੀ ਐ ਅੱਛਾ ਜੀ ਧਿਆਨ ਦੀ ਦੌੜੀ ਸਰਤਾਂ ਦੀ ਸਰਤੇ ਸ਼ਬਦ ਨਾਲ ਜੁੜੀ ਪਕੜੀ ਹੋਈ ਐ ਉਹ ਕੰਨੇ ਹੱਥ ਚਾ ਡੋਰੀ ਉਹਦੀ ਅੱਛਾ ਜੀ ਜੇ 2 ਘੰਟਾ ਦੇ ਵੇਲੇ ਉਹ ਕੋਹ ਜਿਵੇਂ ਜਿਵੇਂ ਹੁਕਮ ਨੂੰ ਅਗਿਆ ਲੱਗੇ ਜਾਂਦਾ ਚਾਈ ਜਾਂਦੀ ਹੈ ਠੀਕ ਹੈ ਜੀ ਹਰ ਗੁਣ ਗਾਉ ਰੋ ਪਿਆਨ ਦੋਰੀ ਗਿਆਨ ਦੋਰੀ ਹੁਕਮ ਤੇ ਹੱਥ ਚ ਸੁਰਤ ਉਹਨਾਂ ਦੀ ਠੀਕ ਹੈ ਜੀ ਹੁਕਮ ਨਾਲ ਜੁੜੀ ਹੋਈ ਹੈ ਜੋ ਖਿੱਚੇਦੈ ਉਹਨਾਂ ਦੇ ਵੇੜੇ ਜਿਨ ਖਿੱਚੇ ਤਨ ਜਾਈਏ ਹਰ ਗੁਣ ਗਾਏ ਸਦਾ ਰੰਗ ਰਾਤੇ ਬਹੁੜ ਨ ਪਛੋ ਤਾਈਏ ਹਰ ਗੋਣ ਆਏ ਸਰਦਾਰਾਂ ਨੂੰ ਆਤੇ ਹਰ ਗੋਣ ਜਾਂਦੇ ਨੇ ਸਰਦਾਰਾਂ ਦੀ ਚੜਦਾ ਰਹਿਦਾ ਨਾਮ ਦਾ ਹੂੰ ਉਹ ਪਿੱਛੋਂ ਨੂੰ ਪੈਂਦਾ ਜੀ ਦੁਆਰਾ ਦੁਬਾਰਾ ਕਿਉਂ ਪਿੱਛੋਂ ਨੂੰ ਗਏ ਇਹ ਰੁਕ ਕੇ ਨੇ ਉਹ ਜਿਹੜੇ ਮਾਇਆ ਦੇ ਰੰਗ ਦੇ ਵਿੱਚ ਰੰਗੇ ਜਾਂਦੇ دیਵਾਨੇ ਨੇ ਅੱਛਾ ਜੀ ਆਓ ਆ ਜਿਹੜੇ ਹੋਰੇੜਾ ਪਾਇਆ ਹੈ ਨੇ ਹੂੰ ਆ ਝਗੜਿਆਂ ਚ ਪਾਇਆ ਝਗੜਿਆਂ ਚ ਉਹ ਪਿੱਛੋਂਦੇ ਨੇ ਠੀਕ ਹੈ ਜੀ ਪੱਬੈ ਭਲੈ ਕੋਣ ਨਾ ਪੱਛੋ ਤੱਕਦਾ ਹਾਂਜੀ ਪੱਬੈ ਭਲੈ ਗੁਰਮੁਖ ਬੂਝੈ ਧਨ ਨਿਜਕਰ ਵਾਸਾ ਪਾਈਐ ਪੱਬੈ ਭਲੈ ਗੁਰਮੁਖ ਬੂਝੈ ਗੁਰਮੁਖ ਠੀਕ। ਉਹ 부ਝ ਲੈਣੇ ਜਿੱ ਘਰ ਪਾਸਾ ਪਾਈਆ ਫੇਰ ਇੱਕ ਨੇ। ਹੂੰ ਹੂੰ। ਤੇ ਚੀਜ਼ 부ਝੀ ਜਾਂਦੀ ਆ ਫੇਰ ਠੀਕ ਨੇ। ਠੀਕ ਹੈ ਜੀ। ਨਾ 부ਝਣ ਵਾਲੀ ਚੀਜ਼ ਸਾਰੀ ਸਾਰੀ ਸਮਝਣ ਵਾਲੀ ਤਾਂ ਚੀਜ਼ੇ ਦੀ ਹੈ। ਪੜਨ ਤਾ ਚੀਜ਼ 부ਝਣ ਵਾਲੀ ਐ ਤੁਸੀਂ ਇਹਨੂੰ ਵਿਧੇ ਅਪਣਾ ਲਿਆ। ਬਿਤੇ ਅਰੇ ਨਾਰੇ ਚ ਲੈ ਆਂਦਾ ਤੇ ਜੱਜਾ ਦਾ ਧਾਇਰਾ ਤੈਪਾ ਹਰੇ ਹਾਂਜੀ ਆ ਇਹ ਪੱਬਾ ਇਹ ਪੱਬੇ ਅੱਖਰ ਦੀ ਗੱਲ ਹੋ ਰਹੀ ਹੈ ਜੀ ਲਿਖਿਆ ਪੱਬਾ ਅੱਖਰ ਵੀ ਹੁੰਦਾ ਨਾ ਪੱਬਾ ਦਾ ਮੂਹੇ ਹੂ ਰਖਦਾ ਅੱਛਾ ਜੀ ਉਹ ਤੋਂ ਭਾਲਣਾ ਅੱਤੇ ਤੋਂ ਸਭ ਸਰੇਸ਼ ਲਵ ਦੇ ਭਾਲਣ ਬਣਦਾ ਹੈ। ਅੱਛਾ ਜੀ। ਅੱਤੇ ਤੋਂ ਭੌਜਲ ਵੀ ਬਣਦਾ ਹੈ। ਹਾਂ ਹਾਂ। ਅੱਤੇ ਤੋਂ ਪਰਮ ਵੀ ਬਣਦਾ ਹੈ। ਜੀ। ਗੁਰਮੁਖੀਆ ਘਰ ਭੇਤੋ ਬਣਦਾ ਭਾਣ ਅੱਛਾ ਜੀ ਹਾਂ ਠੀਕ ਹੈ ਜੀ ਪੱਬੈ ਗੁਰਮੁਖੀਆ ਠੀਕ ਹੈ ਜੀ ਪੱਬੈ ਪੌਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਏ ਗੁਰਪ੍ਰਸਾਦੀ ਆਪੋ ਚੀਨੇ ਜੀਵਤਿਆਂ இਬ ਮਰੀਏ ਪੱਬੈ ਪੌਜਲ ਵੀ ਤਾਂ ਨਾਲੇ ਬਣਿਆ ਹਾਂਜੀ ਔਰ ਮਾਰਗ ਵਿਖੜਾ ਹੈ ਕਿਹੜਾ ਮਾਰਗ ਹੂੰ ਏ ਬਖੇੜਾ ਕਰਦਾ ਜੇ ਤਰ ਮੰਦਾ ਮਾਨਾ ਚਤਰੀ ਇਕ ਤਾਂ ਨਹੀਂ ਹੁੰਦਾ ਇਹ ਮਾਰ ਕੇ ਭੌਜਲ ਦਾ ਅੱਬਾ ਬੌਤਲ ਆਸ ਨਿਰਾਸ਼ਾ ਤਰੀਏ ਇਹ ਜੇ ਤਰਨਾ ਦਾ ਆਸ ਤੇ ਨਿਰਾਸ਼ਾ ਹੋ ਜੋ ਹਰ ਸਾਧੀਆਂ ਚਾਵਾਂ ਤੇ ਆਪਈ ਤਰਿਆ ਜਾ ਸਕਦਾ ਮਾਇਆ ਦੀਆਂ ਆਸਾਂ ਨੂੰ ਛੱਡ ਕੇ ਆਦੀ ਹਰੇਚਾਨ ਉਤੇ ਅੱਗੇ ਹੀ ਤਰਿਆ ਜਾ ਸਕਦਾ ਆਸ ਤੋਂ ਮੇਰਾਸਾ ਹੋ ਕੇ ਹੀ ਤਰਿਆ ਜਾ ਸਕਦਾ ਗੁਰ ਠੀਕ ਹੈ ਜੀ ਗੁਰ ਆਪੋ ਚੀਨੈ ਜੀਵਤੈ ਮਰਿਏ ਆਪੋ ਚੀਨ ਗੁਰ ਪ੍ਰਸਾਦੀ ਆਪੋ ਚੀਨੈ ਜਦੋਂ ਇਹਨੂੰ ਗਿਆਨ ਬਣ ਗਿਆ ਨਾ ਹਾਂਜੀ ਓਦੀ ਕਿਰਪਾ ਲੈਣਾ ਜੀ ਗੁਰਬਾਣੀ ਦੇ ਗਿਆਨ ਨਾਲ ਆਪਣਾ ਆਪ ਖੋਜੇ ਆਪੋ ਜੀਣੇ ਆਪਣੀ ਮਾਇ ਨੂੰ ਜਾਣਦੇ ਮੈਂ ਕੀ ਹਾਂ ਬਸ ਉਹ ਬੈਨੂ ਬੁਝੇ ਲੈ ਬੁਝੇ ਤਾਂ ਦਰਸੂ ਜੇ ਜੀਵਤ ਆ ਮਰ ਮਰ ਜਾਂਦਾ ਪਰ ਉਹ ਉਹ ਬੁਝੇ ਨਾਲ ਉਹ ਬਹੁਤ ਛੜਦਾ ਮਰ ਗਿਆ